शलोक महला चौथा भक्ति सरोवर उछले सुपर भरे वहन जिना सतगुरु मन्नेया जन नानक वड्भाग लहन भक्ति सरोवर उछले सुपर भरे बहुद चल भक्ति दा सरोवर उछलदा ना हिरदा उछल जांदा है भरके फिर अगे पग पांदा पौड़ी ਉੱਪਰ ਭਰੇ ਜਿਹੜੇ ਨੇ ਫਿਰ ਵਹਿ ਪੈਂਦੇ ਨੇ ਫਿਰ ਉਹ دریا ਬਣ ਜਾਂਦਾ ਜਿੱਦਾਂ ਜਦ ਭਰਦਾ ਨਹੀਂ ਉਹਨਾਂ ਜਦ ਭਰ ਜਾਂਦਾ ਫਿਰ ਵਹਿ ਨਿਕਲਦਾ ਬਾਹਰ ਪ੍ਰਗਟ ਹੋ ਜਾਂਦਾ ਹੈ ਲੋਕਾਂ ਵਾਸਤੇ ਹੁੰਦਾ ਉੱਪਰ ਭਰੇ ਜਿਹੜੇ ਫੁੱਲ ਭਰ ਜਾਂਦੇ ਨੇ ਉਹ ਵਹਿਦੇ ਨੇ ਉਹਨਾਂ ਚੋਂ ਫਿਰ ਵਗਦਾ ਅੱਗੇ ਉਹ ਅੱਗੇ ਵਗਿਆ ਫਾਈ ਤੇ ਸਾਨੂੰ ਮਿਲਦਾ ਹਾਂਜੀ ਜਿਨ੍ਹਾਂ ਸਤਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਜਿਨ੍ਹਾਂ ਸਤਗੁਰ ਮੰਨਿਆ ਜਿਨ੍ਹਾਂ ਨੇ ਸਤਗੁਰ ਦੀ ਗੱਲ ਭਲੀ ਏ ਜਨ ਨਾਨਕ ਵੱਡ ਭਾਗ ਲਹਨ ਨਾਨਕ ਕਹਿੰਦਾ ਉਹਨਾਂ ਨੂੰ ਭਾਗ ਪ੍ਰਾਪਤ ਹੋਏ ਨੇ ਵੱਡੇ ਭਾਗ ਉਹਨਾਂ ਦੇ ਹੋਏ ਨੇ ਉਹਨਾਂ ਨੂੰ ਇਹ ਗਿਆ ਮਿਲਿਆ ਜਿਵੇਂ ਧਾਰੂ ਉਪਰ ਆਕਾਸ਼ ਉਹਨਾਂ ਦੇ ਅੰਦਰ ਇਹਨਾ ਪ੍ਰਕਾਸ਼ ਹੋਇਆ ਜਿਵੇਂ ਧਾਰੂ ਉਪਰ ਆਕਾਸ਼ ਪ੍ਰਭ ਜੀ ਦੀ ਕੇ ਬੁਰ ਪ੍ਰਕਾਸ਼ ਜੈਸੇ ਤਾਰੂ ਪਰ ਆਕਾਸ ਇਹ ਵੱਡੇ ਭਾਗਾਂ ਵਾਲੇ ਨੇ ਤਾਰੂ ਪਰ ਆਕਾਸ ਵਾਲੇ ਉਹ ਫਿਰ ਬਹਿ ਤੁਰਿਆ ਅੱਗੇ ਆਕਾਸ ਤੋਂ ਅੱਗੇ ਬੈ ਕੇ ਸੱਚਖੰਡ ਜਾ ਹੋ ਗਏ ਫਿਰ ਦੋਏ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਆਗਮ ਆਗਾਦ ਹਰ ਜਨ ਕਿਤ ਵਿਧ ਮਿਲੇ ਮਿਲਾਇਂ ਹਰ ਆਲੋਕ ਅਸੰਖ ਹਰ ਦੇ ਜਿਹੜੇ ਨਾਮ ਨੇ ਗੋਲ ਗੋਲ ਬਾਸ਼ਿਕ ਨੌਂਦੇ ਉਹਦੇ ਜਿਹੜੇ ਗੋਲ ਨੇ ਹੁੰਦੇ ਹੀ ਨੌਂਦੇ ਉਹ ਤਾਂ ਅਸੰਖ ਨੇ ਉਹਦੀ ਗਿਣਤੀ ਨਹੀਂ ਉਹਨਾਂ ਦੀ ਕੀਤੀ ਜਾ ਸਕਦੀ ਹਰ ਆਰ ਕੇ ਗੋਣ ਕਥਨ ਨਾ ਜਾਏ ਹਰ ਦੇ ਤਾਂ ਕਥਨ ਨਹੀਂ ਕੀਤੇ ਜਾ ਸਕਦੇ ਕੋ ਕਥਨੇ ਨਹੀਂ ਕੀਤੇ ਜਾ ਸਕਦੇ ਉਹ ਨਾਮ ਆਪ ਸਾ ਖੜੇ ਹਰ ਗੋਣ ਇੱਕ ਨਾਮ ਹੁਦਾ ਨਾਮ ਦਾ ਇੱਕ ਵੀ ਨਹੀਂ ਵੈਸੇ ਗੁਰਵਾਚਨ ਅਨੁਸਾਰ ਹੀ ਹਰ ਹਰ ਅਗੰਭੂ ਅਗਾਧ ਹਰ ਚਨ ਕਿੱਦ ਵਿਦ ਜਿਲੇ ਨਾ ਤਾਂ ਕੋਈ ਪਹੁੰਚ ਸਕਦਾ ਸਰੀਰ ਕਰਕੇ ਨਾ ਬੁੱਧੀ ਦੀ ਇਹ ਦੌੜ ਕੋਤੇ ਤਕ ਉਡਾਰੀ ਜਾਂਦੀ ਹੈ ਬੁੱਧੀ ਦੀ ਉਡਾਰੀ ਬਣੀ ਜਾਂਦੀ ਸਰੀਰ ਕਰਕੇ ਨਹੀਂ ਪਹੁੰਚ ਸਕਦਾ ਅਗਾਂਹ ਰਾਹ ਹੈ ਹਰ ਜਨ ਕਿੱਤ ਵਿਦ ਕਰਕੇ ਜਿਹੜੇ ਹਰ ਕੇ ਜਨ ਹੈ ਕਿਹੜੀ ਵੀਂਦੀ ਨਾਲ ਮਿਲੇ ਉਹਨੂੰ ਜਾ ਕੇ ਮਨਣਾ ਬੁਲਾਏ ਤਾਂ ਕਿ ਉਹ ਬੁਲਾ ਲਵੇ ਜਾਣਗੇ ਤਾਂ ਹੀ ਬੁਲਾਊਗਾ ਮਿਲੇ ਤੇ ਮੈਂ ਮਰਦੋਂ ਦੇ ਤਵੇਂ ਇਹੜੇ ਜਾਣ ਤਾਂ ਕਿ ਉਹ ਵਿੱਚੇ ਬੁਲਾ ਲਵੇ ਆਪਣੇ ਦਰਿਆ ਨੂੰ ਖੂਦ ਦਾ ਦੇ ਕਿਨਾਰੇ ਨਾਲ ਟੱਚ ਹੋਣਾ ਪੈਂਦਾ ਫਿਰ ਬੁਲਾਉਂਦਾ ਉਹ ਫਿਰ ਵਿੱਚੇ ਬੁਲਾ ਲੁੰਦਾ ਆਪਣੇ ਹੋਂਦ ਦਰਿਆ ਨੂੰ ਪੈਦਲ ਹੋ ਜੀ ਜੀ ਕਿਤ ਵਿਧੀ ਮਿਲੇ ਮਿਲਾਹੇ ਹਰ ਹਰ ਜਸ ਜਪਤ ਜਾਪੰਤ ਜਨ ਇੱਕ ਤਿਲ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗੰਮ ਪ੍ਰਭ ਹਰ ਮੇਲੇ ਲੈ ਹੋ ਲੜ ਲਾਈ ਹਰ ਹਰ ਜਸ ਜਸ ਜਪਤ ਜਪੰਤ ਜਪਾਇਆ ਹੋਇਆ ਜਪਦੇ ਰਹੋ ਸੈਂਦਾਂ ਮਤਲ ਹਰ ਹਰ ਦਾ ਜਾਸਾ ਜਿਹੜਾ ਉਹ ਜਪਾਇ ਤੇ ਬਿਨਾਂ ਦੀ ਜਪਿਆ ਜਾ ਸਕਦਾ ਆਪ ਜਪਾਏ ਜਪੇ ਸੋਨੂੰ ਜਨ ਨਹੀਂ ਕੀਬਦ ਪਾਏ ਜਾਣਦੇ ਵਸਦੀ ਗੱਲ ਨਹੀਂ ਖ਼ਤਿਰ ਵੀ ਚੀਜ਼ਤ ਆਪਣੇ ਨਾਲ ਜਪ ਲਵੇ ਜਪਾਇਆ ਹੈ ਜਪੇ ਅਜੀ ਜਪਿਆ ਆਪਣੇ ਆਪ ਜਿਹਨਾਂ ਨੇ ਕੁਝ ਲਿਖਿਆ ਨਾ ਹਰ ਜਸ ਬਿਰੋ ਮਿਲੇ ਤੇ ਬਿਰੋ ਉੱਧਰ ਜੁੜੇ ਤੇ ਬਿਰੋ ਠੀਕ ਨਹੀਂ ਹੈ ਤੁਮ ਉਸਤ ਤੁਪਤੇ ਹੋਏ ਜਿਨਾਂ ਜਰ ਇੱਕ ਹੋ ਗਿਆ ਉਹਨਾਂ ਜਰ ਉਸਤ ਤਬੀਕ ਕੀਤੀ ਜਾ ਸਕਦੀ ਜਿਨਾਂ ਜਰ ਆਪ ਹੋ ਕੇ ਉਗਿਆ ਰਹੀ ਉਨਾ ਚਿਰ ਉਸਤ ਕੀਤੀ ਹੋਈ ਗਲਤ ਆ ਠੀਕ ਨਹੀਂ ਆ ਬਹੁਤ ਵਾਰਤਾ ਹੋਣਾ ਚਾਹੀਦਾ ਜਨਨਾਨਕ ਹਰ ਅਗੰਭ ਪ੍ਰਭ ਹਰ ਮੇਲ ਲੈ ਹੋ ਲੜ ਲਾਏ ਜਨਨਾਨਕ ਕਹਿੰਦਾ ਹਰ ਅਗੰਮ ਮਨੁੱਖੀ ਬੁੱਧੀ ਤੋਂ ਪਰੇ ਹੈ ਪ੍ਰਭ ਹਾਰੋ ਹਰ ਪ੍ਰਭ ਹਰ ਪ੍ਰਭ ਬੇਲ ਲੈ ਹੋ ਹਰ ਪ੍ਰਭ ਬੇਲ ਲਿਓ ਤੂੰ ਅਗੰਮ ਮੇਰੀ ਬੁੱਧੀ ਦੇ ਵਾਸਤੇ ਗੱਲ ਨਹੀਂ ਟੈਡੂ ਮਿਲਣਾ ਤੂੰ ਆਪੇ ਮਿਲ ਲੈ ਮੈਨੂੰ लेहो लाल लाल बेधो अपनी लाल लाल हो जी सावड़ी हर अगम अगोचर अगम हर क्यों कर हर दर्शन तिक्खा किच वखर होए ना ਸਾਡੇ ਵਸ ਦੀ ਗੱਲ ਨਹੀਂ ਉੱਥੇ ਪਹੁੰਚੀਏ ਕਿਸੇ ਸਾਧਨ ਨਾਲ ਅਗੋਚਰ ਹੈ ਅਗੰਮਹਾਰ ਬੁੱਧੀ ਤੋਂ ਫੇਰ ਪਰੇ ਸਾਰਿਆਂ ਦੀ ਬੁੱਧੀ ਤੋਂ ਪਰੇ ਹੈ ਕਿਉਂ ਕਰ ਹਰ ਦਰਸ਼ਨ ਦੇਖੋ ਫਿਰ ਉਹਦੇ ਦਰਸ਼ਨ ਕਿਵੇਂ ਤੇ ਦੇਖੇ ਜਾ ਸਕਦੇ ਨੇ ਆ ਤਾਂ ਬੁੱਧੀ ਦੀ ਪਹੜਚਾ ਨਾ ਉੱਥੇ ਕੋਈ ਜਾ ਸਕਦਾ ਔਰ ਦੇਖਿਆ ਜਾ ਸਕਦਾ ਤੇ ਫਿਰ ਉਹਦੇ ਦਰਸ਼ਨ ਦੇਖਣ ਦਾ ਜਿਹੜੀ ਗੱਲ ਹੈ ਉਹ ਕਿਵੇਂ ਹੋਵੇ ਕਿਵੇਂ ਉਹਦੇ ਦਰਸ਼ਨ ਦੇਖੇ ਜਾਣ पिखा पिखा लब्ध है देखा नहीं है समझ कि ओदी शक्ल ओदी सूरत ओदा रूप ओदा रंग के हो गया ये समझ के मैं आबे बेतू पता के मैं लगे बेतू हां जी अच्छा पिखा पढ़ना है जी हां पिखा हर अगम अगोचर अगम हर क्यों कर हर दर्शन पिखा किछ वखर सो वर्नीय है ਤੇ ਸਰੂਪ ਨਾ ਰੱਖਾ ਉਹਦੀ ਤਾਂ ਕੋਈ ਰੂਪ ਰੇਖ ਨਹੀਂ ਹੈ ਰੂਪ ਹੈ ਨਹੀਂ ਜਿਹਦੀ ਲਖੀਤ ਵੀ ਵਿੱਚ ਜਗੀਏ ਕੋਈ ਵਸਤੂ ਹੋਵੇ ਤਾਂ ਉਹਦਾ ਵਰਣਨ ਮੈਟਰ ਕੀ ਕਰੀਏ ਕੋਈ ਰੂਪ ਹੋਵੇ ਉਹਦੀ ਸ਼ਕਲ ਬਣਾ ਕੇ ਦੱਸ ਰੇਖਾ ਖਿੱਚ ਕੇ ਦੱਸ ਇਹ ਵੀ ਹੈ ਜੀ ਰੂਪ ਰੇਖ ਉਹਦੀ ਹੈ ਕੋਈ ਨਹੀਂ ਤੇ ਕਿਵੇਂ ਮਸਲਾ ਹੱਲ ਹੋਵੇ ਹਾਂ ਜਿਸ ਬੁਝਾਏ ਆਪ 부ਝਾਏ ਦੇ ਸੋਈ ਜਨ ਦਿਖਾ ਸਤ ਸੰਗਤੀ ਸਤ ਗੁਰ ਛੱਟ ਸਾਲ ਹੈ ਜਿਤ ਹਰ ਗੁਣ ਸਿੱਖਾ ਜਿਤ 부ਝਾਏ ਜਿਹਨੂੰ 부ਝਾ ਦਵੇ ਕੌਣ 부ਝਾ ਦਵੇ ਆਪ 부ਝਾਏ ਦੇਈ ਆਪੇ 부ਝਾ ਦਵੇ ਸੋਈ ਜਨ ਦਿਖਾ ਉਹ ਜਨ ਨੂੰ ਦਰਸ਼ਨ ਹੋਇਆ ਜਿਹਨੂੰ ਆਪੇ 부ਝਾ ਦਿੰਦਾ ਉਹਦੇ ਦਰਸ਼ਨ ਹੋਇਆ ਜਿਹਦੇ ਸਾਹਮਣੇ ਆਪੇ ਖੜਾ ਹੋ ਜਾਂਦਾ ਆ ਕੇ ਉਹ ਹੀ ਦੇਖ ਸਕਿਆ ਜਿਹੜੇ ਹਿਰਦੇ 'ਚ ਆਪੇ ਪ੍ਰਗਟ ਹੋ ਜਾਂਦਾ ਉਹਨੂੰ ਉਹਦੀ ਸਮਝ ਆਈ ਹੈ ਸਤ ਸ੍ਰੀ ਅਕਾਲ ਸਤਗੁਰ ਸਾਲ ਹੈ ਜਿਤ ਹਰ ਗੁਣ ਸਿੱਖਾ ਸਤ ਸੰਗਤ ਦੇ ਵਿੱਚ ਸਤਗੁਰ ਦੀ ਚੜ੍ਹ ਸਾਲ ਹੈ ਚੜ੍ਹ ਸਾਲ ਹੈ ਜਿੱਥੇ ਪੜ੍ਹਾਈ ਹੁੰਦੀ ਹੈ ਜਿੱਥੇ ਸਿੱਖਿਆ ਮਿਲਦੀ ਹੈ ਜਿਤ ਹਰ ਗੁਣ ਸਿੱਖਾਂ ਉੱਥੋਂ ਹਰ ਗੁਣ ਦੇ ਅਰੀਦੇ ਗੁਣ ਉਹਦੀ ਸਿੱਖਿਆ ਮਿਲਦੀ ਹੈ ਉਹ ਤਾਂ ਹਰੀ ਦੇ ਗੁਣਾਂ ਬਾਰੇ ਜਾਣਕਾਰੀ ਮਿਲਦੀ ਹੈ ਉਹਦੀ ਗੁਣਾਂ ਦੀ ਜਾਣਕਾਰੀ ਤੋਂ ਹੀ ਹਰਦੀ ਜਾਣਕਾਰੀ ਦੀ ਸਮਝ ਆਉਂਦੀ ਹੈ ਹਾਂਜੀ ਇਹ 4 ਸਾਲ ਹੁੰਦਾ ਚਟ ਹੁੰਦਾ ਹੈ ਹੁੰਦਾ ਅੱਛਾ ਜੀ ਇਹਨੂੰ ਸਕੂਲ ਨੂੰ ਚਟ ਕਹਿੰਦੇ ਹਨ ਜੀ ਜਿੱਥੇ 4ੜੇ ਪੜ੍ਹਦੇ ਹੁਣ ਠੀਕ ਹੈ ਸਤ ਸੰਗਤ ਸਤ ਗੁਰ ਹੈ ਜਿੱਥੇ ਹਰ ਗੁਣ ਸਿੱਖਾਂ ਤਨ ਤਨ ਸੋ ਰਸਨਾ ਤਨ ਕਰ ਤਨ ਸੋ ਪੰਦਾ ਸਤਿਗੁਰੁ ਜਿਤ ਮਿਲਹਰਿ ਲੇਖਾ ਲਿਖਾਂ ਤਨ ਤਨ ਤੋਂ ਰਸਨ ਤਨ ਕ ਤਨ ਤਨ ਸੋ ਰਸਨਾ ਤਨ ਕਰ ਤਨ ਸੋ ਪੰਦ ਸਤਿਗੁਰੁ ਜਿਤ ਬਿੜਿਐ ਹਰ ਲੇਖਾ ਲਿਖਾਂ ਉਹ ਸਮਝਾਇਆ ਗਿਆ ਜਿਹੜੀ ਰਸਨ ਉਹਨੇ ਬੋਲਿਆ ਉਹ ਵੀ ਧੰਨ ਜਿਹੜੀ ਬੁੱਧੀ ਨੇ ਮੈਨੂੰ ਸਮਝਾਇਆ ਰਸਨ ਬੁੱਧੀ ਆ ਜਿਹੜੀ ਬੁੱਧੀ ਨੇ ਬੋਲ ਕੇ ਮੈਨੂੰ ਸਮਝਾਇਆ ਸਾਰਾ ਗਿਆਨ ਉਹਦੀ ਬੁੱਧੀ ਵੀ ਧੰਨ ਹੈ ਧੰਨ ਕਰ ਸੋ ਪੰਧਾ ਉਹ ਪੰਧਾ ਵੀ ਉਹ ਵਾਲਾ ਜਿਹਨੇ ਮਾਰਗ ਦੱਸਿਆ ਪੰਧ ਹੀ ਹੈ ਜਿਹੜਾ ਰਾਹ ਦਾ ਉਹ ਪੰਧਾ ਜਿਹਨੇ ਮੈਨੂੰ ਰਾਹ ਦੱਸਿਆ ਉਹ ਕੌਣ ਹੈ ਉਹ ਸਤਿਗੁਰੂ ਹੈ ਕਿਤ ਮਿਲ ਹਰ ਲੇਖਾ ਲਿਖਾ ਜਿਹਨੂੰ ਆ ਬਿਲ ਕੇ ਮਾਇਆ ਹੁਣ ਲੇਖਾ ਲਿਖਿਆ ਤੂ ਆ ਆ ਜਿਹੜਾ ਲੇਖਾ ਹੁਣ ਲਿਖਿਆ ਇਹ ਕੀ ਲਿਖਿਆ ਲੇਖਾ ਛਾੜ ਅਲੇਖੇ ਇਹ ਲੇਖਾ ਲਿਖਿਆ ਲੇਖਾ ਛੱਡ ਦੋ ਲੇਖਾ ਭੁੱਲ ਜਾਓ ਅਲੇਖੇ ਹੋ ਜਾਓ ਆਪ ਬਸ ਨਹੀਂ ਇਹ ਲੇਖਾ ਲਿਖਿਆ ਤੇ ਲੇਖਾ ਦੁਆਰਾ ਲਿਖਿਆ ਹੁਣ ਜਦ ਲਗ ਜਾਣਾ ਮੈਂ ਵਿੱਚ ਤਬ ਲਗ ਗਰਭ ਜੋਨ ਮੈਂ ਧਰਤਾ ਜਬ ਧਾਰੇ ਕੋ ਬੈਰੀ ਵੀਤ ਤਬਲਗ ਨਿਸ਼ਚੈ ਨਾਹੀ ਕੀਤ ਇਹ ਲੈ ਜਬ ਲਗ ਬੋ ਮਗਨ ਸਖਮਾਏ ਤਬਲਗ ਧਰਮ ਲੈ ਰਾਏ ਦੇਸ ਜਾਏ ਇਹ ਲੇਖਾ ਜਿਹੜਾ ਹੁਣ ਲਿਖਿਆ ਉਹਨੂੰ ਮਿਲ ਕੇ ਉਹ ਬੋਲਦਾ ਜਿਹਨੇ ਦੱਸਿਆ ਲੇਖਾ ਸਮਝਾਇਆ ਜਿਹੜੇ ਗੁਰੂ ਨੇ ਲਿਖਾਇਆ ਉਹ ਸਾਰੇ ਧੰਨ ਦੇ ਅੱਛਾ ਜੀ ਧੰਨ ਧੰਨ ਸੋ ਰਸਨਾ ਧੰਨ ਕਰ ਧੰਨ ਸੋ ਪਾਉਂਦਾ ਸਤਗੁਰੂ ਜਿਤ ਮਿਲ ਹਰ ਲੇਖਾ ਲਿਖਾ ਧਨ ਕਰਦਾ ਭਾਵ ਕੀ ਇਹ ਲਿਖਾ ਜਿੱਤ ਮਿਲ ਹਰ ਲੇਖਾ ਲਿਖਾ ਲਿਖਾ ਲਿਖਿਆ ਹੈ ਅੱਛਾ ਤੇ ਪਿੱਛੇ ਗੁਣ ਸਿੱਖਾ ਆਊਗਾ ਕਿ ਸਿੱਖਾ ਆਊਗਾ ਇਹ ਤਾਂ ਪਲੂਰਲ ਹੀ ਆਊਗਾ ਸਿੱਖਾ ਨੂੰ ਸਾਲਾ ਫਿਰ ਆਊਗਾ ਜਿੱਤ ਮਿਲ ਹਰ ਲੇਖਾ ਲਿਖਾ ਪਰ ਜਿਹੜਾ ਧਨ ਕਰ ਐ ਹੱਥ ਨੂੰ ਕਿਹਾ ਜੀ ਕਰ ਤੈਨੂੰ ਮੰਨੋ ਉਹਨੂੰ ਵੀ ਤੈਨੂੰ ਮੰਨੋ ਮੁਸੂਲੀ ਟੱਡ ਕਰ ਗਈ ਮਨ ਅੱਛਾ ਜੀ ਤੇ ਕਾਰ ਹੁੰਦਾ ਤਾਂ ਔਂਕੜਾ ਜਾਂਦਾ ਵਰਦਾ ਇੱਕ ਵਜੇ ਨਾ ਕਾਰ ਹੁੰਦਾ ਤਾਂ ਉਹ ਔਂਕੜਾ ਹੁੰਦਾ ਤੇ ਪੰਦਾ ਸਤਿਗੁਰੂ ਜੀ ਸਤਗੁਰ ਪੰਦਾ ਹੈ ਸਤਿਗੁਰੂ ਅਰ ਸਤਗੁਰ ਜਾ ਕੇ ਤਾਂ ਉਹ ਬੋਲਦਾ ਉਹ ਬੋਲਦਾ ਠੀਕ ਹੈ ਜੀ ਇੱਕ ਮਿੱਕਾ ਹੀ ਆ ਉਦੋਂ ਕੋਈ ਠੀਕ ਹੈ ਜੀ ਇੱਥੇ 8ਵੀਂ ਪੌੜੀ ਸਮਾਪਤੀ ਹੈ ਜੀ ਹਾਂ ਜੀ